ਰਬ ਦਾ ਸਮਰਮ ਸਾਬ ਦਾ ਉਚਾਰ ਰਬ ਦਾ ਜਿਹੜਾ ਸਮਾਨਾ ਸਭ ਤੋਂ ਉਹ ਵੀ ਭਕਤੀਆਂ ਨੇ ਉਹ ਜਿਹੜੀਆਂ ਬੋਲਦੀਆਂ ਨੇ ਭਕਤੀ ਕਮਲ ਦਾ ਮੈਰੂ ਮੈਰੂ ਕਾ ਮਨ ਨੂੰ ਹੀ ਨਹੀਂ ਇੱਛਾਵਾਂ ਤਾਂ ਰੁਕਦਾ ਹੀ ਨਹੀਂ ਹੈ ਕਹਤਾ ਇੱਛਾ ਰੁਕਦੀ ਹੋਈ ਹੈ ਜਲ ਕਾਮਯਾਬ ਨੂੰ ਤੋਂ ਕੁਛ ਜਰਵਾਸਾ ਰੋਲ ਦੇ ਪਰ ਉਹ ਪੁੱਛਣਾ ਕੁਛ ਨਥੇਨ ਹਾਉ ਸਭ ਸਿੰਘ ਦਾ ਹੈ ਉਹ ਹੈ ਆਸਾ ਦਾ ਤਰਕ ਹੈ ਹੈ ਵੀ ਲੋਕ ਛੱਡਣਾ ਹੈ ਛੱਡਣਾ ਉਹ ਛੱਡਣਾ ਜਾਇ ਵੀ ਛੱਡੋ ਤਾਂ ਉਹ ਨਹੀਂ ਛੱਡਦੇ ਪਰ ਪਤਾ ਤਾਂ ਹੈ ਹਰੂ ਜੀ ਝੂਠ ਬੋਲਣ ਮਾੜਾ ਦਾ ਬੋਲਦਾ ਹੀ ਹੈ ਜਿਹੜਾ ਮਾੜਾ ਕੀਤਾ ਉਹ ਹਾਂ ਸਭ ਤੋਂ ਉੱਚਾ ਉੱਚਾ ਵਸਦਾ ਉੱਚਾ ਵਸਦਾ ਸਭ ਨੂੰ ਕੋਈ ਨਾ ਹੈ ਕਿ ਕੱਸਦਾ ਹੈ ਸਭੁਰ ਦਾ ਬਰੋਗੀ ਹੈ ਅਗਰ ਵੀਜਦਾ ਇਕ ਅੱਖੜ ਉਪਰ ਹਰੇ ਜਿਹੜੇ ਨੀਵੇਂ ਨਹੀਂ ਉੱਚਾ ਹੈ ਪ੍ਰਭੂ ਕੈ ਸਿਮਰਨ ਨੂੰ ਤਾਂ ਪ੍ਰਭੂ ਕੈ ਸਿਮਰਨ ਉੱਚਾ ਕਹਿਣਾ ਮਤਲਬ ਜਿਹੜੇ ਹੋਰ ਦੇ ਸਿਮਰਨ ਨਾਲ ਪ੍ਰਭੂ ਕੈ ਸਿਮਰਨ ਉੱਚਾ ਰੌਕਾ ਸੁਲਮਣ ਬਾਕੀ ਸਬਨਾਂ ਨਾਲ ਉਚਾਇ ਰੌਕਾ ਇਸਮਾਨਾ ਨਾ ਹੋ ਸਕੋ ਮੁਸਲਮਾਨਾ ਬੋਤਾਂ ਇਤੋਸ ਉਹ ਫੋਟੋ ਨਹੀਂ ਬਣੀਏਗੀ ਕੈਪਿਲ ਸ਼ਕਤੀ ਕਹਿੰਦਾ ਕੀ ਇਹਦਾ ਗਿਆਨ ਨਹੀਂ ਹੈ ਸਿੱਧੇ ਉਹਦਾ ਗਿਆਨ ਨਹੀਂ ਹੈ ਫਿਰ ਖੁਦਾ ਉਹਦੇ ਵਿੱਚ ਫਰਕ ਦਾ ਪਤਾ ਨਹੀਂ ਹੈ ਖੁਦਾ ਮਾਇਆ ਵਿੱਚ ਉਹ ਦੱਸ ਗਿਆ ਗਿਆਨੀ ਹੈ ਮਸਲ ਹੈ ਖੁਦਾਇ ਕਹਤੋ ਜੋਗੋ ਬੁਰਬੀ ਮਾਰਾਂ ਤਾਂ ਕਿਆ ਹੋਸੀ ਖੁਦਾ ਦਾ ਧਿਆਨ ਨਹੀਂ ਹੈ ਸਿਰਫ ਖੁਦਾ ਦੀ ਹੈ ਬੇਟਾ ਖੁਦਾ ਜੁੰਬੀ ਚ ਆ ਗਿਆ ਖੁਦਾ ਹੈ ਵੀ ਹੈ ਵੀ ਜਿਵੇਂ ਮਾਇਆ ਵਿੱਚ ਉਹ ਦਸਿਆ ਮੈਂ ਮਾਇਆ ਵਿੱਚੋਂ ਰਸ ਕਿਉਂ ਮਾਇਆ ਦਾ ਬੇਟਾ ਹੈ ਜੀ ਉਹ ਕਿੱਥੇ ਹੈ ਸਵਾਲ ਹੈ ਉਹ ਜਗਾ ਘੜੀ ਆ ਜਿੱਥੇ ਮਾਇਆ ਦੀ ਦਸਤੀ ਹੈ ਕੋਈ ਸੈਸੁਤ ਕਾ ਘਾਟ ਉਸ ਸੈਸੁਤ ਘਾਟ ਹੈ ਅੱਧ ਦਸਤੀਓਂ ਕਿ ਬੈਠਾ ਕਿੱਥੇ ਜਗਾ ਕਿੱਥੇ ਮਾਇਆ ਕਿੱਥੇ ਸੈਸੁਤ ਕਾ ਘਾਟ ਹੈ ਜਿੱਦਿ ਉੱਥੇ ਉੱਥੇ ਜਿਹੜਾ ਹੈ ਜਿਆਦਾ ਸੀ ਕਹਿਣਾ ਆ ਪ੍ਰਾਪਤ ਕਰ ਸਮਾਣਾ ਦੁਸ਼ਕੁਲ ਕਰ ਕਿਛਾ ਦੁਸ਼ਮਣ ਕੌਣ ਨੇ ਇਹ ਮੰਨਦਾ ਸਾਡੇ ਦੁਸ਼ਮਣ ਹੁੰਦੇ ਨੇ ਫਿਰ ਐਸੀ ਕਹਿੰਦਾ ਦੁਸ਼ਮਣ ਹੁੰਦੇ ਦੀ ਹਾਲੇ ਫੋਕਸ ਹੋਇਆ ਜੀ ਉਸਾਂ ਤੇ ਸਿਰਫ ਜੋ ਦੁਸ਼ਮਣ ਜਿਵੇਂ ਆਗਰਣ ਨੇ ਨਹੀਂ ਆਗਰਣ ਕਹਤਾ ਉਹ ਵੀ ਗਲਤ ਹੈ ਪਕੜ ਜ਼ਰੂਰ ਨੇ ਔਗਣ ਦੁਸ਼ਮਣੇ ਸਾਡੇ ਹੈ ਦੁਸ਼ਮਣ ਔਗਣ ਤੇੜਾ ਵਾਲੇ ਨੇ ਸਾਡੇ ਸੁਣ ਔਗਣ ਜਿਹੜੇ ਨੇ ਚੇਤਨ ਹੀ ਆ ਔਗਣ ਵਾਇਰਸ ਕੀ ਹੈ ਵਾਇਰਸ ਵਾਇਰਸ ਤੋਂ ਪਹਿਲਾਂ ਹੋਈ ਹੈ ਵਾਇਰਸ ਕੌਣ ਛੜਦਾ ਹੈ ਵਾਇਰਸ ਛੜਦਾ ਦੁਸ਼ਮਣ ਹੋਵੇ ਨਹੀਂ ਚੇਤਨ ਹੈ ਕੋਈ ਚੇਤਨ ਸਾਖਾ ਦਾ ਦੁਸ਼ਮਣ ਦੁਸ਼ਮਣ ਜਦ ਦੁਸ਼ਮਣ ਦਾ ਦੁਸ਼ਮਣ ਹੈ ਜਿਹੜਾ ਕਾਰੀ ਹੈ ਉਹ ਨਾਮ ਦਾ ਫਰੋਦ ਕਰਦਾ ਹੋਇਆ ਦੁਸ਼ਮਣ ਉਹ ਆਪ ਦੁਸ਼ਮਣ ਹੈ ਸੱਚ ਦਾ ਜਿਹੜੇ ਸੱਚ ਦੇ ਦੁਸ਼ਮਣ ਨੇ ਉਹਨਾਂ ਦੀ ਗੱਲ ਹੈ ਸੱਚ ਦੇ ਦੁਸ਼ਮਣ ਜਦੋਂ ਵੀ ਸੱਚ ਪਰਗਟ ਹੁੰਦਾ ਤਾਂ ਦੂਰ ਰਹਿੰਦੇ ਨੇ ਫਿਰ ਉਹਨਾਂ ਨੇ ਮੋਹ ਕਰਦੇ ਦੁਸ਼ਮਣ ਜੋ ਕੁੱਤਾ ਹੋ ਜਾਂਦਾ ਨੇ ਮਕਾਵਲਾ ਨਹੀਂ ਕਹਿੰਦਾ ਪ੍ਰਧਾਨ ਜਾ ਕੇ ਉਸ ਪਰੇ ਤਰੇ ਆਹ ਪਰ ਇਹ ਰਹਿਣਾ ਨੇ ਬੜਾ ਦੇ ਰੋ ਪਾਸਾ ਵੱਟ ਕੇ ਰਹਿਣਾ ਲੋ ਸਮਝ ਉਹ ਇਹ ਕਹਿੰਦੇ ਨੇ ਵੀ ਸਮਾਜ ਤੇ ਗੱਲ ਕੋਈ ਸੁਣਾਈ ਨਾ ਜੇ ਅਸੀਂ ਤਾਂ ਚਾਹਤਾਂ ਲਈ ਲੋਕ ਜਿਆਦਾ ਸੁਣਨ ਲੱਗ ਜਾਣਗੇ ਇਹ ਸਾਡੀ ਪਬਲਿਕ ਬੇਸੀ ਹੋ ਜੂ ਉਹ ਟਲੇ ਰਹਿਣੇ ਨੇ ਉਹ ਤੋਂ एवे इधर انا بھی ایک نکتن جوڑا لو پک کے اپ چپ کر دوں گا پھر اسی پھر بولا کھولنا جبیں تુલسی راز اور کچھ کرنا ہا وہ کہا تુલسی پاوز کے سب وسا دیس میں کئی وار کہیں اوندے کوکل سا دے مان کویل چپ کر ਨੇ ਬੋਲਦੀ ਥਿਉਨੇ ਬੋਲਦੀ ਆਉਤੋ ਦਾਦਰ ਬਖਸ਼ਾ ਭਏ ਹਮੇ ਕੁਝ ਇਸ ਕੋ ਜਦ ਬਹੁਤ ਜੋਰ ਸ਼ੋਰ ਨਾਲ ਮੰਨਵਾਤਾ ਪ੍ਰਚਾਰ ਹੁੰਦਾ ਸੱਤ ਉਹ ਚੁੱਪ ਵੀ ਕਰ ਜਾਂਦੀ ਜਿਹੜੇ ਥੋੜੇ ਕੱਚੇ ਸੱਚਾ ਲੈ ਜੁੱਸ ਲਾ ਜਾਂਦੇ ਕਿਉਂ ਸੈਟੀਸਫਾਈ ਕਰਾ ਨਹੀਂ ਸਕਦਾ ਕਰਾ ਨਹੀਂ ਸਕਦੇ ਉਹਨਾਂ ਦਾ ਪ੍ਰਚਾਰ ਬੰਦਮ ਹੁੰਦਾ ਉਹਨਾਂ ਦਾ ਪ੍ਰਚਾਰ ਲਾਊਡਸ ਵੀ ਕਰਾਣਾ ਹੁੰਦਾ ਜਿਵੇਂ ਇਹਨਾਂ ਦਾ ਪ੍ਰਚਾਰ ਲਾਊਡਸ ਵੀ ਕਰਾਣ ਨਾਲ ਕਬੂਲੇ ਸਨਾਸਿ ਨਹੀਂ ਬੰਦੇ ਰੱਬ ਨੂੰ ਲੈ ਲੋ ਬਣਾਓ ਤਾਂ ਬਣਾਓ ਕਿਆ ਹੈ ਨਹੀਂ ਬਣਾਉਣ ਜੋ ਹੈ ਨਹੀਂ ਉਹ ਚੁੱਪ ਕਰਨਾ ਬੰਦ ਕਰੋ ਨਾਲਾ ਪ੍ਰਚਾਰ ਛਾਤੀ ਥੋਕ ਕੇ ਨਹੀਂ ਪ੍ਰਚਾਰ ਹੋ ਸਕਦਾ ਸੱਚ ਦਾ ਜਿੰਨਾ ਕਿ ਸਾਫ਼ ਸੇਹੀ ਕਰ ਸਕਦੇ ਉਹ ਸੱਚਾ ਹੈ ਖੜਾ ਨਹੀਂ ਕਰ ਸਕਦੇ ਸਾਹਮਣੇ ਦਿਖਾ ਨਹੀਂ ਸਕਦੇ ਉਹ ਤਾਂ ਹੀ ਗਿਆ ਜੇ ਮੈਨੂੰ ਨੇ ਦਰਸ਼ਨ ਕਰਾ ਦੋਗੇ ਜਿਹੜਾ ਸੀਗਾ ਆਪਣਾ ਉੱਡਾ ਸੋਨਾ ਤਰਖੀ ਰਾ ਤਰਖੀ ਲੈ ਬੜਾ ਸੋਹਣਾ ਹਾਂ ਦਰਸ਼ਨ ਭਾਇਆ ਹੋ ਕਰਦਾ ਨੇ ਚੋ ਆਦਮ ਇੱਕ ਉੱਥੇ ਆ ਗਿਆ ਸੀ ਉਹ ਮੈਂ ਕਿਹਾ ਤੁਮਾਨੂੰ ਦਰਸ਼ਨ ਕਰਨ ਵਾਲਾ ਦਿਖਾ ਦੇ ਮੈਂ ਦਰਸ਼ਨ ਕਰਾਦਾ ਕੰਦੇ ਹੀ ਤੂੰ ਕੌਣ ਹੈ ਬਈ ਕਿੱਥੇ ਤੂੰ ਅਖੜਾ ਦਾ ਹੈਗਾ ਮੈਂ ਕੋ ਬੰਦਾ ਨਹੀਂ ਸੀ ਤੂੰ ਨਹੀਂ ਇਹ ਆਵਨੂ ਤੇਰੀ ਅੱਖਾਂ ਨੇ ਨਾ ਤਨੀਂਦੇ ਸਰੀਰ ਦੀ ਨਾ ਤੂੰ ਵੀ ਸੀਂਦਾ ਜੇ ਤੂੰ ਨਿਕਲ ਜਾਏਗਾ ਦਰਦ ਦੇ ਘੜੇ ਪੂਰੀ ਮਟੀ ਉਹ ਆ ਤੂੰ ਪਤਾ ਨਾ ਤੈਨੂੰ ਆਪਣਾ ਤਾਂ ਪਤਾ ਨਹੀਂ ਤੂੰ ਗੱਲਾਂ ਕਰਦਾ ਰੱਬ ਦੇ ਥੱਲੇ ਹੱਜ ਉਹਦੇ ਰਹਿ ਗਏ ਜਿੰਨਾ ਜਰ ਤੁਸੀਂ ਦਿਖਾ ਨਹੀਂ ਸਕਦੇ ਸਾਤੀ ਧੋਕੇ ਪ੍ਰਚਾਰਕਾਂ प्रचार ਤੇ कर ਅਗੇ ਕਹੇ ਰੁਕ ਅਸੰਤ ਕਾਹਦੇ ਖੜਾ ਅੰਗੜ ਕੇ ਕਾਹਦੇ ਪਾ ਜਾਂਦਾ ਨੇ ਚੋਨੀ ਵਰਦੇ ਤੁਹਾਨੂੰ ਪਤਾ ਹੈ ਕਿ ਕਿਹਦਾ ਆ ਪਬਲਿਕ ਦੇ ਵਿੱਚ ਫੜ ਲਿਆ ਬੇਇੱਜ਼ਤੀ ਹੋ ਜੂਗੀ ਪੱਲੇ ਹੈ ਜੀ ਕੁਛ ਚੁੱਪ ਕਰ ਗਏ ਇੱਕ ਬਹੁਤ ਦੇ ਸੀਗਾ ਤੇ ਜਦੋਂ ਸੱਚ ਕਮ ਲੋਕ ਸੱਚ ਦਾ ਪ੍ਰਚਾਰ ਸੱਚ ਦਾ ਪ੍ਰਚਾਰਕ ਖੁਦ ਸੱਚ ਨੂੰ ਪ੍ਰਗਟ ਕਰ ਦਿਆ ਸਮਰਥ ਹੋ ਜਾਂਦਾ ਹੈ ਸੋ ਪ੍ਰਚਾਰ ਹੋਣੀ ਕਰਦਾ ਰਹੂ ਕੋਪੋਧਾ ਕੋ ਪੂਰਾ ਖਸਾਲਾ ਜੂਦਾ ਲੋਕਾਂ ਨੇ ਸਵਾਲਾਂ ਜਵਾਬ ਹੁੰਦੇ ਨਹੀਂ ਪਰੰਤ ਦਾ ਨਾ ਸਿਣ ਕੇ ਸਰਦਾ ਹੋ ਫਿਰ ਉਹਦੇ ਚ ਕਮਜ਼ੋਰੀ ਹੁੰਦੀ ਹੈ ਔਰ ਦੂਜਾ ਪ੍ਰਚਾਰ ਭਾਵੀ ਹੋ ਜਾਂਦਾ ਇਸ ਕਰਕੇ ਦੂਜੇ 부چھے ਹੋਣਾ ਨਾ ਮੈਨੂੰ ਮੁਝੇ 부چھے ਹੋਣਾ ਨਾ ਉੱਚੇ ਨਹੀਂ ਹੁੰਦੇ ਉਹ 부ਚਾ ਹੁੰਦਾ ਤੇ ਕਾਰੀ ਬੋਟਾ ਬੋਤੀ ਬੁੱਧੀ ਵਾਲਾ ਜਿਹੜਾ ਕਹਿੰਦਾ ਰੱਬ ਹੀ ਨਹੀਂ ਉਹ ਕਹਿੰਦੇ ਤਾਂ ਸੁਣੋ ਵੀ ਰੱਬ ਸਾਬਤ ਕਰੋ ਤੁਸੀਂ ਹੈ ਦੀ ਆ ਗਿਆ ਉਹਨਾਂ ਨੂੰ ਅਸੂਜਿਕ ਇਸ ਕਹਿੰਦੇ ਗਾਦੇ ਹੋਏ ਹੈ ਜੀ ਜਿਹੜੀ ਚੀਜ਼ ਤੁਸੀਂ ਸਾਬਤ ਨਹੀਂ ਕਰ ਸਕਦੇ ਜੇ ਮੈਂ ਐਸੀ ਕਹਿੰਨਾ ਹੈਗਾ ਤੁਸੀਂ ਕਹਿੰਦੇ ਸਾਬਤ ਕਰੋ ਤੁਸੀਂ ਕਹਿੰਦਾ ਹੈ ਦੀ ਤੁਸੀਂ ਸਾਬਤ ਕਰੋ ਸਾਬਤ ਕਰਨ ਵਾਲੇ ਬਹੁਤ ਸਾਰੇ ਆਲੇ ਰਿਕਾਰਡ ਵਾਲੇ ਲੋਕਾਂ ਹੋ ਗ੍ਰੰਥ ਬਣੇ ਹੋਏ ਨੇ ਉਹਨਾਂ ਦੀ ਸਾਨੂੰ ਸਮਝ ਅਲੱਗ ਗੱਲ ਹੈ ਇਸ ਲੋਕਾਂ ਦਾ ਵਿਸ਼ਵਾਸ ਹੈ ਜਦਾਂ ਵਜਿਆ ਹੋਇਆ ਜਾਂਦੇ ਸਾਬਤ ਹੋ ਚੁੱਕਿਆ ਸੀ ਸਾਡੇ ਬਜ਼ੁਰਗਾਂ ਨੂੰ ਹੋ ਗਿਆ ਉੱਪਰ ਚੜ੍ਹ ਵੀ ਨਹੀਂ ਪਹਿਨਾ ਹੋ ਗਿਆ ਉਹ ਕਈ ਚੰਗੋ ਸਾਲ ਦੇ ਚੱਲਿਆ ਥੋੜੀ ਸਮਾਂ ਹੀ ਗੱਲ ਤਾਂ ਅਸੀਂ ਵੀ ਬੁੱਢੀ ਜਾਂਦੇ ਹਾਂ ਨਾ ਲੋਕੋ ਕੁਰਬਾਨੀ ਦੇ ਸਭ ਰੱਖਦੇ ਨੇ ਪੱਥਾ ਚੇਤਦੇ ਨੇ ਅ ਜਿਵੇਂ ਉਹ ਅਨਦੇ ਦੇ ਬਣ ਵੀ ਬਹੁਤ ਬੜੀ ਸ਼ਕਤੀ ਹੈ ਜੇ ਪਤਾ ਨਹੀਂ ਕੀ ਹੈ ਹੁਣ ਜਦੋਂ ਇਹਦੀ ਸਮਝ ਆਉਂਦੀ ਹੈ ਕੋਈ ਸਮਝ ਲੈਂਦਾ ਲਿਖਿਆ ਹੋਇਆ ਸਮਝਣ ਵਾਸਤੇ ਲਿਖਿਆ ਹੋਇਆ ਉਹ ਲੋਕ ਫਿਰ ਬਚਾਤੀ ਕਰਦੇ ਸਮਝਣ ਵਾਲੇ ਹਲਚਲ ਹੀ ਹੁੰਦੇ ਪੈਦਾ ਹੁੰਦੇ ਰਹਿੰਦੇ ਨੇ ਹਾਂ ਫਿਰ ਫਿਰ ਜਨਮ ਲੈ ਜਾਂਦੇ ਨੇ ਖੁਦਾ ਦਾ ਗਿਆ ਫੁੱਲਾਂ ਤੋਂ ਫੜ ਕਾਹ ਗਿਆ ਉਹ ਨਹੀਂ ਰਹਿੰਦੇ ਨੇ ਇਹ ਕਰਕੇ 12 ਸਾਲ ਚਲਦੀ ਹੈ ਹੰਡਰਡ ਇਹ ਵਿਚਾਰਧਾਰਾ ਇਹ ਵਿਚਾਰਧਾਰਾ ਜਿਹੜੀ ਇਹਨੂੰ ਸਰਸਤੀ ਕਹਿੰਦੇ ਨੇ ਤਾਂ ਤਾਂ ਗ੍ਰੰਥਾਂ ਕਿਹਾ ਵੀ ਸਰਸਤੀ ਆ ਜਿਹੜੀ 12 ਕੋ ਤਾਂ ਜਲਦੀ ਹੈ ਜਮੀਨ ਦੇ ਵਿੱਚ 12 ਕੋ ਜਲਦੀ ਹੈ ਜਮੀਨ ਤੇ ਬਾਹਰ ਉਹ ਜਮੀਨ ਚਾਹੇ ਤੇ ਜਲਦੀ ਹੈ ਗੱਲ ਇਹ ਅੰਦਰ ਤੇ ਫਿਰ ਗੱਲ ਕੀ ਹੋਈ 100 ਤੋਂ 347 ਸਾਲ ਦਾ ਲੋਕ ਉਪਚਾਰ ਦੇ ਨੇ ਜੇ ਫਿਰ ਜਾਂਦੀ ਹੈ ਗੱਲ ਫਿਰ ਜਦ ਪਤਾ ਲੱਗ ਜਾਂਦਾ 100 200 ਸਾਲ ਫਿਰ ਉੱਪਰ ਚਲਦੀ ਹੈ ਤੇ ਸਾਡੇ ਲੋਕ ਅਦਾ ਕਰਦੇ ਨੇ ਇਹ ਜਾਂ ਕੁਝ ਐਦਾ ਫਿਰ ਉਹ ਜਿਹੜੀ ਬੋਟੀ ਬੁੱਧੀ ਵਾਲੇ ਰਹਿ ਜਾਂਦੇ ਨੇ ਬਰੀਕ ਬੋਟੀ ਵਾਲੇ ਘਾਣੇ ਘੜ ਜਾਂਦੇ ਨੇ ਉਹ ਫਿਰ ਨਹਾਦਾ ਜਾਇਆ ਥੋੜਾ ਬਹੁਤਾ ਸਮਝਿਆ ਫਿਰ ਦੂਜੇ ਜਦੋਂ ਇਹਨਾਂ ਦਾ ਪ੍ਰਕਾਰ ਬੁੱਧਾ ਪੈਂਦਾ ਦੂਜੇ ਫਿਰ ਜੜੂਟ ਬੋਲਣ ਲੱਗ ਜਾਂਦੇ ਫਿਰ ਕੋਕਲ ਚੁੱਪ ਕਰ ਜਾਂਦੀ ਹੈ ਪਤੋ ਗਾਣ ਉਹ ਆਪਣਾ ਦਵਲਦੇ ਅਗਰ ਉਹਨਾਂ ਤੋਂ ਵੀ ਲੋਕ ਦੇਖ ਲੈਣ ਤਾਂ ਵੀ ਠੱਗੇ ਨੇ ਉਹ ਬਰਮ ਹੋ ਜਾਂਦਾ ਜੇ ਮੈਂ ਸਭ ਤੋਂ ਵੇ ਸਾਰੇ ਉਹ ਲਖਣਵੜੀ ਅਗਰ ਚੂੜਾਵੜੀ ਬਾਹਰ ਤਾਂ ਹੋ ਜਾਂਦਾ ਕੋਟ ਬਿਖੁੱਟੇ ਨਾਂ ਦਾ ਅਮਗਲੇ ਵੇ ਅਗਰ ਕੂੜ ਆਫੇ ਹੋ ਜਾਂਦਾ ਤੋ ਕਮਜ਼ੋਰੀਆਂ ਕਿੰਨਾਂ ਗੱਲ ਕੋਲ ਹੋਦੀ ਪਹਿਲਾਂ ਕੋ ਸੰਤ ਸਵੇ ਸੀ ਫੇਡੇਰੇ ਬੜਾ ਪੂਬਲੀਆਂ ਆਉਂਦੇ ਬਦਕੇ ਲੋਏ ਅਜੂ ਵੀ ਆਲੇ ਘੋੜਾ ਆ ਗਿਆ ਤਾਂ ਮੱਖੀ ਵੀ ਆ ਗਈਆਂ ਤੁਮ ਜੀ ਮਾਇਆ ਵਾਸਤੇ ਹੀ ਲੋਕ ਹੁਣ ਰਹੋਦੇ ਨੇ ਸੰਤ ਬਣਦੇ ਨੇ ਕਲਿਆਣ ਵਾਸਤੇ ਕੋਈ ਨਹੀਂ ਸੰਤ ਹੁੰਦਾ ਜਿਹੜੇ ਕਲਿਆਣ ਵਾਸਤੇ ਸੰਤ ਹੋਣ ਉਹਦੇ ਜਾਨ ਕੋਈ ਨਹੀਂ ਆਉਂਦਾ ਮਹਾਨ ਦੇ ਜਾਨ ਕੋਈ ਮਤਲਬ ਨਹੀਂ ਉੱਥੇ ਕਲਿਆਣ ਵਾਲੀ ਜਿੱਥੇ ਗੱਲ ਦੀ ਤੇ ਚਲੇ ਪਈ ਜਾਣ ਤਾਂ ਛੱਡ ਗਿਆ ਜਾਂਦੇ ਨੇ ਕਿਉਂ ਤੇ ਗੱਲੇ ਕੋਈ ਨਹੀਂ ਹੈ ਜਿਹੜੀ ਉਹਨਾਂ ਚਾਹੀਦੇ ਉੱਤੇ ਗੱਲੇ ਦੀ ਤਾਂ ਛੱਡ ਕੇ ਆ ਜਾਣਾ ਗੱਲ ਦੇ ਅਜੱਟ ਗਈ ਐ ਅਸੀਂ ਸਾਡੇ ਕੋਲ ਕੋਈ ਛੱਡਾ ਉਹਦਾ ਮੈਸੇਜ ਤੇ ਬੰਦਾ ਹੀ ਮੇਰੇ ਬੰਦੂ ਗੱਲ ਉਹ ਮੈਨੂੰ ਚਾਹੀਦਾ ਤਾਂ ਇਹਨਾਂ ਲੈ ਲੈ ਜੀ ਮਜ਼ਾ ਨਹੀਂ ਕਰ ਕੋਲ ਲੈਣਾ ਘਰ ਬਾੜੀ ਹਾਂਜੀ ਪ੍ਰਭ ਕਾ ਸਭ ਤੋਂ ਉੱਚਾ ਪ੍ਰਭ ਕਾ ਸਭ ਤੋਂ ਉੱਚਾ ਦੂਹੇ ਜ਼ਬਨ 'ਤੇ ਹੈ ਖੁਦ ਤੱਕ ਆ ਜਾਂਦਾ ਹੈ ਹਲਕਾਰਨ ਤੁਹਕੇ ਦੇਖ ਕੰਮ ਵੀ ਹੈ ਦੂਸਰੇ ਧਰਮ ਜਿਹੜੇ ਜੋ ਪੂਰੀ ਤੀਕ ਦੇਖ ਕਮਤਾ ਹੈ ਉਹਦੇ ਚੇ ਨਹੀਂ ਕਿਦਾ ਨੂੰ ਲੋਕ ਕਹਿੰਦੇ ਨੇ ਉਹ ਦੇਖੀ ਕਰਦਾ ਕਰਦਾ ਵੀ ਬੁੱਧ ਚਲੀ ਹੋ ਜਾਂਦੀ ਹੈ ਜੀਵਨ ਹੋ ਜਾਂਦੀ ਹੈ ਤਾਂ ਚਰਮਤਾ ਹੋਈ ਹੈ ਦੇਖੀ ਕਰਦਾ ਚਲ ਬਾਂਹ ਸਾਰੀ ਕੋਈ ਨਹੀਂ ਖੁੱਲਦੀ ਨਾ ਸੇ ਦੇਖ ਕਮਤਾ ਹੋ ਜਾਂਦਾ ਨੇਖ ਹੋਣਾ ਵੀ ਉਪਲਬਧੀ ਪਾਟਾ ਸਾਫ ਹੋਵੇ ਤੱਕ ਅਜਿਹਾ ਮਜੀਦੋ ਤਬਾਰ ਹੈ ਉਦੋਂ ਦੁੱਧ ਪਾਣਾ ਤਿਆਰ ਖੜਾ ਹੋਵੇ ਤੇਰੇ ਭਾਂਡੇ ਜਿਹਾ ਲੱਗਿਆ ਹੋਵੇ ਇਹ ਗੱਲ ਹੈ ਤੁਹਾਡਾ ਸਾਫ ਹੋਵੇ ਤਾਂ ਦੁੱਧ ਛੇਦ ਦੇ ਬਰਜਾ ਫਿਰ ਇੱਛਾ ਹੋਵੇ ਜਦ ਭੁੱਖ ਲੱਗੂਗੀ ਜਦ ਬਰਜੂ ਭਾਂਡਾ ਸਾਫ ਹੋਣਾ ਚਾਹੀਦਾ ਮੇਰੇ ਸਤੋਕੀ ਹੋ ਜਾਂਦੇ ਨੇ ਉਹ ਭਾਂਡੇ ਸੱਚ ਬਣ ਜਾਂਦੇ ਸੱਚ ਮਿਲਿਆ ਸਤੋਕੀਆਂ ਸੌਦੇ ਫਿਰ ਜੇ ਸੱਚਾ ਤੁਹਾਡਾ ਹੋਵੇ ਕੋਈ ਸੰਤੋਖ ਹੋ ਜਾਵੇ ਤੇ ਸੰਤਤਾ ਸੰਤੋਖ ਹੋ ਗਿਆ ਨਾ ਸਭ ਤੋਂ ਬੇਸੰਤੋਖ ਹੋਗੇ ਮਾਇਆ ਦੇ ਬੜਵੜੀਆਂ ਕਾਰਾਂ ਬੜਬੜੇ ਉਧਰੋਂ ਬਹਿ ਗਏ ਸਭ ਵਰ ਇਹ ਤਾਂ ਕਰੇ ਜਿਹੜੇ ਆਪਣੇ ਬੰਦੇ ਨੇ ਤੇ ਇਸੀ ਹੋਣਾ ਨਾ ਵੀ ਬਾੜੀ ਹਾਲ ਹੈ ਨਾ ਜਦੋਂ ਇਹਨੂੰ ਲੋਭ ਹੈ ਇਹਨਾਂ ਦਾ ਤੇ ਆਦਮੀ ਦੀ ਬਾਤ ਕਰਤੀ ਦੇ ਇਹ ਕੋਈ ਸੰਤ ਨਹੀਂ ਨਾ ਸਾਹੀਂੀ ਬੋਲਦਾ ਐ ਨਾ ਨਾ ਇਹ ਫਿੱਤੇ ਚੋਰਾਣੀਆਂ ਕੀਤੀ ਐ ਮੈਂ ਚੋਰਾ ਚੋਰਾਣੀ ਆਇਓ ਇਹ ਨਾ ਬਸ ਤਾਉ ਕੀਤਾ ਹੈ ਉਹਦੇ ਵਿੱਚ ਉਹਨਾਂ ਪਤਾ ਵੀ ਅਸੀਂ ਚੋਰ ਹੁੰਦਾ ਉਹ ਚੋਰ ਨੂੰ ਬਹੁਤੀ ਇੱਜਤ ਨਾਲ ਨਹੀਂ ਬੁਲਾਉਣਾ ਹੁੰਦਾ ਉਹ ਇਸੇ ਪੋਰ ਦੇ ਵਿੱਚ ਬੁਲਾਉ ਦੋਸਦਾ ਚੋਟਾ ਹੈ ਉਹ بولਣ گے پھر سب تو جان گے وی چور جیڑی مارے موڑے رہندی ہے جتھوں بھی چلی جاؤں ہوں تاں کرن تے کوئی نہیں سنتا جو مرے گا نا گڈی اور سیدھا ہن چوڑ تے چلا لو کہہن بھی اے تو بڑے ہیں چب ਸ਼ਰਧਾ ਮੋਟੀ ਬੁੱਤੀ ਵਾਲੇ ਨੇ ਜਨਮ ਜੂਏ ਜਾਰਦੇ ਲੋਕਾਂ ਨੂੰ ਗਿਠਾ ਨਾ ਆਉਂਦੀ ਸ਼ਰਧਾ ਜੀ ਮੈਂ ਆਪ ਤਾਂ ਮੈਂ ਜਾ ਖਾਂ ਨਾ ਯਾ ਉਹ ਜੀ ਖਾਂ ਜਮਾ ਤਮਾਕੂ ਖਾਨਾ ਕਲਚਰ ਹੋਣ ਵਾਲੇ ਉਹਦਾ ਮੈਨੂੰ ਪਤਾ ਕਿ ਗੁਰੂ ਦਾ ਫੇਰ ਵੀ ਨਹੀਂ ਹਟਦਾ ਦੇ ਖਾਨ ਤੇ ਫਿਰ ਬੁੱਧੀ ਬੁੱਧੀ ਜਹਰ ਕੀ ਉਹ ਪਤਾ ਹੈ ਕਿ ਇਹਦੇ ਵਿੱਚ ਬਹੁਤ ਹੈ ਫਿਰ ਵੀ ਮਾਣ ਕਰੀਏ ਨਾ ਸਾਡੇ ਨੂੰ ਫਿਰ ਬੁੱਧੀ ਨਹੀਂ ਦੱਸੀ ਉਹ ਆਪਣੇ ਆਪ ਨੂੰ ਕਹਿੰਦਾ ਰਹੇ ਤੇਰੀ ਬੁੱਧੀ ਚਲੀ ਆ ਖਾਣ ਗਿਆ ਮੇਰੀ ਬੁੱਧੀ ਮਾਰੀ ਗਿਆ ਕੋਈ ਵੀ ਨਹੀਂ ਕਹਦਾ ਉਹ ਜੋ ਅਗਰ ਨਹੀਂ ਕਹਦਾ ਉਹ ਦੁਹਾਈ ਜਿਹੇ ਰਸਤਾ ਕਹਿੰਦਾ ਉਹ ਲੜੂਗਾ ਉਹ ਇਸ ਕਰਕੇ ਬੁਚਾ ਢਿਲਾ ਲਾਉਦਾ ਇਹ ਮੋਢੀ ਗੁੱਦੀਆਂ ਨਾਲ ਵਸਿਆ ਹੈ ਜਿੱਡਾ ਉੱਚਾ ਨਾ ਆਹ ਦੇਖੋ ਬੁਚਾ ਲੁਕਿ ਥੋਇ ਪਾਉ ਬੁਚ ਭਾਰਾ ਵੱਡਾ ਤੋਰ ਲਪਾਉ ਭਾਇ ਜਿਹੜੀ ਇਹ ਸਭ ਤੋਂ ਜ਼ਿਆਦਾ ਬਜਾਇਦਾ ਸਰਤੇ ਹੈ मेरा जेड़ा पहाड़ है ना दोए पहाड़ नुं सरीया सरी पर तिने नो ज्यादा पाड़ा है ता एदा पाहुच पाड़ा वड्डा तोल धर्मत होली बोले बो धर्मता हो अगों जिते भय है धर्मता थोले बोल बोलदा काला हलकी करदा कार वटा जिटा वटा कारू टाव दी गल च दमरी हो ਸੱਚ ਦੇ ਨੇੜੇ ਰਹੋ ਡੀਓਟ ਹੋ ਵਲ ਜਿੱਡਾ ਵੱਡਾ ਹੁਕਮਾਰੂ ਜਿੰਨੇ ਨੇ ਵਰਤਾਓ ਉਹਨੇ ਸੱਚ ਦੇ ਨੇੜੇ ਹੋ ਜਦ ਸੱਚ ਦੇ ਨਾਲ ਚਲਾ ਗਿਆ ਫਿਰ ਜਵਾਨ ਹੀ ਹੋ ਗਿਆ ਸਭ ਤੋਂ ਜਿਹੜਾ ਸੁਭਦਰ ਹੈ ਸਾ ਸਭ ਤੋਂ ਈਮੇ ਜਗਾ ਛਰਤੀ ਤੇ ਹਰ ਕਿੱਦਾ ਬਣ ਜਾਵੇ ਸੁਭਦਰ ਹਾਂ प्रभु के सिमरन तृष्णा बुझे प्राप्त के समाज से शाम हो जाए तृष्णा बुझ जाती है जिसके अंदर तृष्णा है वो प्रभु का स्मरण नहीं करता जल के करता होवे तृष्णा तो घटता लगे आग बुझी बुझी बुझो चले अबे भले ने आपक बुझी तो बुझी बुझी बुझे कुछ तृष्णा रोज घटती जा रहे ਇਹ ਤਾਂ ਬੱਜ ਰਹੀ ਹੈ ਲੋਕਾਂ ਜਿਹੜੇ ਜਿਹੜੇ ਧਾਰਮਿਕ ਆਦਮੀ ਨੂੰ ਨਾ ਤ੍ਰਿਸ਼ ਨੂੰ ਸਭ ਬੱਜ ਰਹੀ ਹੈ ਇੱਕ ਫਸਲਾ ਦੇ ਵੀ ਤਾਂ ਫਿਰ ਸਮਝਦਾ ਹੈ ਥੋੜਾ ਸਮਝ ਦਾ ਨਾ ਤਾਂ ਕੁਝ ਹੋਰ ਇਹ ਬਹਿ ਗਿਆ ਬਹਿ ਗਿਆ ਕਿਸੇ ਕਹਾਵਣੀਓ ਲੱਗਦੀ ਹੈ ਪਰ ਘਿਰ ਬੈਠਿਆ ਹੋਇਆ ਜੈਵ ਆਪਣਾ ਸੁਟਾ ਪਿਆ ਉਤੇ ਕਾਇਮ ਵਾਇਗਰ ਪੈ ਗਿਆ ਜਦੋਂ ਉਸਤਾ ਪੈ ਗਿਆ ਹਾਂ ਪ੍ਰਕਾਸ਼ ਸ਼ਿਵਰਮ ਸ਼ਿਵਰਮ ਸਭ ਕੁਝ ਸਿੱਧਾ ਹਾਂ ਪ੍ਰਾਪਤ ਜਦੋਂ ਸਭ ਕੁਝ ਸਿੱਧਾ ਸਾਰੀ ਜੋਤੀ ਹੋ ਜਾਂਦੀ ਹੈ ਫਿਰ ਕੋਈ ਐਸਾ ਸਵਾਲ ਨਹੀਂ ਹੈ ਜਿਸ ਜਵਾਬ ਕੋ ਕੋ ਦੇ ਸਕੀ ਇਹਦਾ छुटਣ ਦੀ ਵਿਧੀ ਦਾ ਸਵਾਲ ਹੋਵੇ ਹੋਰ ਕੋਈ ਸਵਾਲ ਨਹੀਂ ਪਾਣਾ ਕੋਈ छुटਣ ਦੀ ਵਿਧੀ ਦੇ ਨਾ ਲੇਟਰ ਕੋਈ ਵੀ ਸਵਾਲ ਹੋਵੇ ਉਹਦਾ ਜਵਾਬ ਉਹਨੂੰ ਕੋਹੇਗਾ ਬਾਕੀ ਦੁਨੀਆ ਪਰ ਜਿਹੜੇ ধੂਏ ਦੇ ਉਹ ਬੁਝਿਆਉਣ ਲੈ ਉਹ ਨੇ ਝੂਏ ਨੇ ਬਰੋਦੀਏ ਇਸ ਕਰਕੇ ਉਹ ਬੁਝਾ ਜਿਹੜਾ ਬੋਟਾ ਰਸਤਾ ਹੈ ਜਿਹੜਾ ਕਹਿਣਾ ਇੱਕ ਦੂਸਰਾ ਬੁਝਾ ਅੰਦਰਾਂ ਚੈਗੀ ਦੇਖੋ ਇਹ ਤੇ ਖੰਡਾ ਤੇਤੀ ਬਾੜੋਂ ਨੇ ਕੀਆ ਗੁਜਾ ਦੇ ਤਾਂ ਹੈ ਇਹ ਗੱਲ ਬਰੀਕ ਹੈ ਉਹਨਾਂ ਦੇ ਗੱਲ ਮੋٹے ਬੁੱਧੀਆਂ ਦੀਆਂ ਮੋਟੀਆਂ ਤੇ ਤਟਾਰੀਆਂ ਦੇ ਤੇ ਬਾਣੀਆਂ ਪੰਜ ਪੜ੍ਹ ਲਓ ਅਜੀਬਾ ਹੋ ਵੀ ਹੈ ਮੋਟਾ ਵੀ ਹੈ ਦਬੜਾ ਉਹ ਮੋਟੇ ਉਹ ਤਾਂ ਮੈਨੂੰ ਨਾ ਇੱਕ ਆ ਜਾ ਜਿਹੜਾ 8 108 ਵੀ ਤਾਂ ਚਾਹੀਦੇ ਨਾਲ ਦੇ ਸੰਸਾਠ ਦੇ ਤਾਂ ਨੇ ਪ੍ਰਭੂ ਕੈ ਸਿਮਰਨ ਨਹੀਂ ਜੰਪ ਤਰਾਸਾ ਪ੍ਰਭੂ ਕੈ ਜਪਤ ਨਹੀਂ ਜੰਪ ਹੈ ਉਸੇ ਅਗਲਾ ਜਿਹੜਾ ਲੋਇਦਾ ਕੋਈ ਆਪਣੀ ਪਰਸਪਰ ਗੱਲ ਕਰਦਾ ਅਗਲਾ ਕਹਿਦਾ ਨਾ ਬੀਟ ਬੀ ਇਹ ਤਾਂ ਗੱਲ ਕੋਈ ਜਾ ਸਕਦੀ ਹੈ ਕੋਈ ਬਿਲਕੁਲ ਹੋ ਸਕਦਾ ਤੇ ਆਪਣੇ ਆਪਣੇ ਵਾਸਤੇ ਤੇ ਆਪਾਂ ਨੇ ਆਪਣੇ ਆਪ ਨੂੰ ਰੈਸਟ ਕਰ ਨੂੰ ਜੰਤਰਾ ਸਾਹਿਬ ਹੈ ਆਪਣਾ ਕਮੀ ਸੈਲਫ ਅਨਲਿਸਿਸ ਵੀ ਹੈ ਦੇ ਵਿੱਚ ਇਹ ਦੇ ਵਿੱਚ ਸੈਲਫ ਅਨਲਿਸਿਸ ਦੀਆਂ ਗੱਲਾਂ ਵੀ ਨੇ ਇੱਕ ਖੋਟੇ ਖਰੇ ਦੀ ਪਛਾਣ ਲਈ ਜੋ ਵੀ ਖੋਟੇ ਘਰ ਦੀ ਪਛਾਣ ਨਾਲੇ ਜੇ ਖੋਟਾ ਆਟਾ ਹੈ ਉਹ ਫਿਰ ਤਾਂ ਤ੍ਰਿਸ਼ਨਾ ਬੁਝੂ ਏ ਤ੍ਰਿਸ਼ਨਾ ਹੈ ਨਾਮ ਨੂੰ ਜੇ ਪਹਿਲਾ ਉਹਦੇ ਅੰਦਰ ਤ੍ਰਿਸ਼ਨਾ ਮਾਇਆ ਚ ਹਾਂਜੀ ਪ੍ਰਭ ਕੇ ਸਿਮਰਨ ਆਸਾ ਆਸਾ ਜੋ ਸੀ ਆਇਆ ਜਿੱਤ ਦੀ ਆਸ ਇੱਕ ਆਸਰਾ ਖੁਦ ਬਣਾਇ ਜੋ ਆਸ ਪੂਰੀ ਹੋ ਜਾਂਦੀ ਸਿਰਫ ਕਿਸੇ ਪਰਮੇਸ਼ਵਰ ਨਾਲ ਪੂਰੀ ਹੁੰਦੀ ਆਸ ਸਿਰਫ ਨੇ ਬਣਾ ਉਸਦੀ ਪੂਰੀ ਹੁੰਦੀ ਇੱਕ ਵਜਨ ਚੱਪ ਨਾਲ ਆਸ ਪੂਰੀ ਨਹੀਂ ਨਾਲ ਆਸ ਪੂਰੀ ਨਹੀਂ ਹੁੰਦੀ ਸਿਰਫ ਨਾਲ ਆਸ ਪੂਰੀ ਹੁੰਦੀ ਚੱਪ ਦੇ ਵਿੱਚ ਮੰਨੋ ਨਾ ਮੰਨੋ ਕੋਈ ਪਵਦੀ ਨਹੀਂ ਹੈ ਜਪ ਜਪ ਮੰਨਣ ਦੀ ਕੋਈ ਕੌਣ ਦੀ ਨਹੀਂ ਇਹ ਕਰਕੇ ਭੁੱਖ ਗਿਆਨੀ ਵੱਧ ਜਾਂਦਾ ਜਾਪ ਹੋਣਾ ਕੱਲੋ ਕੱਲੋ ਤੇ ਜਪ ਦਿਓ ਕੋਈ ਹੋਇਆ ਥੋੜੂ ਇਹ ਅਸਾਂ ਬਿਜਾ ਨੇ ਆਪਣਾ ਮਤ ਚਾਪਰ ਤਾਪਰ ਨਹੀਂ ਸਾਡਾ ਬਿਜਾ ਪੈ ਜਾ ਜਿਹੜਾ ਅਸੀਂ ਸਮਝਦੇ ਗੀਆਂ ਬਾਣੀ ਨੂੰ ਕੋਈ ਸੁਝਿਆ ਜੇ ਬਚਾਈ ਨਾ ਹੈ ਸਮਝਦਾ ਗਾਉਂਦੇ ਮੁੱਤਨ ਵਾਲੀ ਗੱਲ ਸਮਝਦਾ ਗੱਤੂ ਦੀ ਸੰਗਿਆ ਦਾਦਾ ਉਹ ਜਿਹੜਾ ਜਪ ਹੈਗਾ ਜਿੱਥੇ ਤੱਕ ਮੁੱਖ ਗੈਦੀ ਬਣ ਜਾਂਦਾ ਜਿਹੜਾ ਉਸ ਵੰਦ ਤੇ ਬਹੀਦਾ ਹੁੰਦਾ ਅਵਰ ਉਪਦੇਸ਼ਾ ਆਪਣਾ ਕਰਦਾ ਇੱਕ ਉਹ ਇਹ ਸਮਝ ਤੱਕ ਹੁੰਦੇ ਉਪਦੇਸ਼ਾ ਇਹ ਨਾਲ ਜਪ ਹੈ ਪੂਰਾ ਦੇਖ ਕਰ ਸਕਦਾ ਗਿਆਨ ਹੈ ਉਪਦੇਸ਼ ਗਿਆਨ ਵਾਲੀ ਕਰ ਸਕਦਾ ਜਾ ਉਬਰ ਉਦੇਸਾ ਜਪਿਆ ਤਾਂ ਹੈ ਉਹਦਾ ਜਪਿਆ ਤਾਂ ਹੈ ਉਬਰ ਉਦੇਸਾ ਦਾ ਜਪਿਆ ਸਮਝਿਆ ਦਾ ਸਮਝਿਆ ਤੱਪੀਏ ਸਿਮਰਣੀ ਸਿਮਰਨ ਦੇ ਅਰਥ ਕਰੋ ਕਿ ਮਤਲਬ ਤੇ ਬਿਨਾਂ ਜੋ ਸਾਰਾ ਯਾਦ ਆ ਜੋ ਸੁੜੇ ਸਾਜਰ ਨਜ਼ਰ ਆਉਂਦੇ ਉਹ ਕਦੋਂ ਭੁੱਲੋਗੇ ਜੋ ਤੁਹ ਬਰਾਬਰ ਸੁਣਿਆ ਸਮਝਿਆ ਹਰੇਕ ਪੰਕਤੀ ਤੇ ਉਹੀ ਦਾ ਖੋਲਣਾ ਭੇਜੂਗਾ ਫਿਰ ਤੇ ਉਹੀ ਖੋਲਣਾ ਭੇਜੂਗਾ ਪਤਾ ਨਹੀਂ ਕਰਨਾ ਪਊਗਾ ਉਹਨਾਂ ਦੇ ਆਦਿ ਕੁਝ ਨਹੀਂ ਹੈਗਾ ਸਿਮਰਤੀ ਤੋਂ ਬਣਿਆ ਜੋ ਜ਼ਿੰਮਰਤੀ ਬਣ ਗਈ ਹਾਂ ਧਿਆਨ ਚ ਕਰੀ ਉਹ ਤਾਂ ਹਰ ਵਾਰ ਧਿਆਨ ਚ ਆਈਏਗਾ ਤੇ ਫਰਮ ਆਇਆ ਕਹਿੰਦਾ ਜਮਾ ਕੰਪਿਊਟਰ ਤੇ ਉਹ ਹੈ ਦਾ ਕੋਈ ਕਰ ਸਕਦਾ ਨਹੀਂ ਕਿ ਤਾਂ ਜਦੇ ਸਾਰੀਆਂ ਬਸਦੀਆਂ ਹੋਣੀਆਂ ਨੇ ਉੱਥੋਂ ਹੀ ਅਸੀਂ ਦੇਖ ਦੇ ਕੀ ਭੜੇ ਬਹੁਤ ਤੇਜੀ ਵਾਲੀ ਗੱਲ ਹੈ ਉਹ ਤਾਂ ਬੋਲੀ ਜਾਵੇ ਤੇ ਰਾਈ ਜਾਵੇ ਇਹਨਾਂ ਟਾਈਮ ਨਹੀਂ ਹੈਗਾ ਵੀ ਉਹ ਹੁਣ ਹੋਇਆ ਕਿ ਇਧਰ ਵਤਿਆ ਦੀ ਉਹਦੇ ਸੋਚਾਂ ਦੇ ਲਾਈਟ ਜਦੇ ਇਸ ਸਿਮਰਨ ਦੀ ਗੱਲ ਹੈ ਸਿਮਰਨ ਸ਼ਕਤੀ ਦੇਣੀ ਹੈ ਸਭ ਕੁਝ ਯਾਦ ਜਿਵੇਂ ਆਪਾਂ ਮਾਇਆ ਤੋਂ ਆਪਣੇ ਸਿਮਰਨ ਜੋ ਦਸਾਰਾ ਮਾਇਆ ਭਾਗੀ ਕਰਾਂਗੇ ਨਾ 8012 ਤੋਂ ਕੋਈ ਕਹਦਾ ਹੀ ਨਹੀਂ ਤੇਜੀ ਨਾਲ ਜੋ ਉਸਮਾਂ ਤੇ ਵਿਚਾਇਆ ਤੇਜੀ ਨਾਲ ਹੋ ਜਾਂਦਾ ਹੈ ਅਬਿਆ ਅਬ ਆਸਿਰਵਦ ਜੇ ਰੋਜ਼ ਆਪਾਂ ਕਰਦੇ ਰਹੀਏ ਆ ਵਾਣੀ ਵਿਚਾਰਦੇ ਰਹੀਏ ਹਰ ਵਕਤ ਬਾਂਸਾ ਪਰ ਬਣਾ ਰੋਟੀ ਖੋ ਜਾਂਦੇ ਛੜਵੋ ਖੋ ਜਾਂਗੇ ਜੀ ਛੜਦਾਂਗੇ ਵਿਸਤ੍ਰੀ ਖੋ ਲੀ ਹਰ ਵਕਤ ਜਿਹੜਾ ਸਾਸ ਸੰਗ੍ਰੋਹਮ ਹੰਤਾ ਹੈ ਜੇ ਤੂੰ ਇਹ ਛਾਲੇ ਆ ਜੂਗੀ ਤੋੜ ਲੈ ਜੇ ਬੇ ਦਵਾਨ ਰਹਿ ਗਿਆ ਜੇ ਛਾਲੇ ਬ੍ਰੇਕ ਆ ਜੂਗੀ ਆਇਓ ਬ੍ਰੇਕ ਤਾਂ ਕਾਫੀ ਆਖੀ ਗੁਰਦੀ ਜਾ ਫਿਰ ਫਤਤਾ ਘੰਟਾ ਹੋਈਦਾ ਮੈਂ ਕਈ ਵਾਰ ਤਾਂ ਜੋੜਨੂੰ। ਕਈ ਵਾਰ ਜਾਦਾ ਵੀ ਟਾਈਮ ਲੱਗਦਾ ਹੈ ਕਈ ਵਾਰ ਕਈ ਦਿਨ ਵੀ ਨਹੀਂ ਜੋੜਦੀ। ਹਾਂ ਜੇ ਜੁੜੀ ਹੋਈ ਰਹੇ ਤੇ ਉਹਦੇ ਵੀ ਉਹ ਤਾਂ ਆਇਆ ਉਹ ਕਿੰਨੀਆਂ ਛੁੱਟੀਆਂ ਘਟਿਆ ਆ। ਨਾ ਉਹਦਾ ਫਿਰ ਜੀ ਕਰਦਾ ਨਹੀਂ ਸਕੂਲ ਜਾਣ ਉਹ ਗੱਲ ਹੈ। ਜਿਹੜੇ ਮਾਹੌਲ ਚ ਰਿਹਾ ਉਹਨਾਂ ਚ ਉਹਦੇ ਦੂਏ ਪਾਸੇ ਪ੍ਰਭਾਵ ਨਾਲ ਫਰਕ ਪੈਂਦਾ ਬਹੁਤ ਫਰਕ ਪੈਂਦਾ ਸੋ ਅਦਿ ਲਾਜੀ ਸਿਮਰਨ ਮੰਨ ਕੇ ਮਿਲ ਜਾਏ ਸਭ ਦੇ ਸਿਮਰਨ ਮੰਨ ਕੇ ਮਿਲ ਜਾਏ ਹੋਰ ਕੋਈ ਤਰੀਕਾ ਹੀ ਹੋ ਜਾਗਾ ਸਭ ਦੇ ਸੁਣ ਸਭ ਜੋ ਖੰਡਾ ਉਹ ਜੋ ਬੋਲਦਾ ਉਹਦੇ ਆਗਿਆ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ सोचना ही नहीं है यार सोचना वो जो जब जिने आ गया लेके काम करनो सोचे भी लोड है पहला जिने आ गया मालिक कोई हो रहा है नौकर बैठा है और वो तो वादे दे दे की बोझ है जो मालिक होकर दूगा जना अगर कहना नहीं बैठा है वो बैठा बैठा राम नालो सारा दिन मारता कहे कुछ है? अपना रेस्ट करिए ਨਾਲਾ ਕਰਾਉਣ ਵਾਲਾ ਜਦ ਹੋਰ ਹੈ ਤੇ ਉਹ ਬਿਲ੍ਹਾ ਨਹੀਂ ਬਿਠਾ ਹੈ ਸਿਧਿਕਲੀ ਬਿਲ੍ਹਾ ਬਿਠਾ ਸਰ ਕੋ ਸਮਝਦਾ ਉਹ ਚੱਲਦਾ ਹੈ ਜਾਂ ਤਾਂ ਮਾਲ ਕਰਾ ਲਈਏ ਹੁਕੂਮਤ ਹੀ ੜੀ ਕਰਦਾ ਉਹਦੇ ਦੀ ਢੋਣ ਵਾਸਤੇ ਕੋਈ ਕੰਬ ਬਹਾਲਾ ਸਰੀਰਨਾ ਕਰਨ ਵਾਸਤੇ ਅੰਕਲੇ ਵਾਸਤੇ ਨਹੀਂ ਹੈ ਜਦਾ ਕੋ ਅੰਤਲੇ ਵਾਰ ਤੇ ਤਾਂ ਸਾਥ ਸਾਥ ਸਿਮਰੋ ਗੋਵਿੰਦ ਇਹ ਫਰਕ ਨਹੀਂ ਜਾਨੂੰ ਪਤਾ ਹੁਕਮ ਦੋ ਹੋ ਗਏ ਹੁਣ ਅੱਡੋ ਅੱਡ ਹੋਇਦਿਆਂ ਅੱਜ ਮਨ ਨੂੰ ਮਨ ਨੂੰ ਕਿਹਾ ਮਨ ਆਪਣਾ ਆਪ ਕਰ ਰਹੇ ਦਾ ਉਹ ਤਾਂ ਸਾਨੂੰ ਕਿਹਾ ਸਾਥ ਸਾਥ ਸਿਮਰੋ ਗੋਵਿੰਦ ਉਹ ਤਾਂ ਤੁਸੀਂ ਫਿਜ਼ੀਕਲ ਕੋਈ ਨਾ ਕਰਦੇ ਜੀ ਸਿਮਰ ਸਕਦੇ ਹੋਂ ਫਿਜ਼ੀਕਲ ਦਾ ਫਰਕ ਫਿਰ ਆਪੇ ਹੋਣਗਾ ਫਿਜ਼ੀਕਲ ਕੰਮ ਕਰਨਾ ਵੀ ਫਰਕ ਨਾ ਆਉਣਾ ਚਾਹੀਦਾ ਜਦੋਂ ਨਾਨਕ ਕਹਿੰਦਾ ਵਿੱਚ ਅੱਲਾ ਸਤਗੁਰੂ ਪਾਏ ਹੋ ਹੁਕਮ ਹੈ ਆਵਾ ਅੰਤਰ ਬਾਹਰ ਨੂੰ ਅੰਦਰ ਇਹ ਚਾਲੇ ਸਤਗੁਰੂ ਪਾਏ ਹਾਂ ਅੰਤਰ ਬਾਹਰ ਸਨ ਰਹੀਏ ਹਾਂ ਅੰਦਰ ਬਾਹਰ ਪਾਏ ਲਗਾਤਾਰ ਸਤਿਗੁਰੂ ਆਪਣੇ ਅੰਦਰੇ ਬੈਠੇ ਰਹਿੰਦੇ ਆਪਣੇ ਆਪ ਨੂੰ ਜੁੜੇ ਸਿਮਰਨ ਵਿੱਚ विचार करते रहने रहे ने छुट्ट लगी बिजली दा जठे आपा गल त नहीं आ रहे कदे कोई ओ त नहीं आ रहा देखो ना चिड़िया खेत नु उरण रखी करनी है ना फियाना भी ये जो वता भी करना विचार के विचार नाल वाता होवे छौ दरे विचार नु पाया ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਬਿਰਸਾ ਜਨਮ ਹੋਇਆ ਉਹ ਜਿਹੜਾ ਸ਼ਰਮਣਾ ਸਿੰਘ ਗਿਆਨ ਵਿਚਾਰ ਨੂੰ ਇਹ ਚਾਲੇ ਸਭ ਕੁਝ ਭਾਈ ਫਿਜ਼ੀਕਲੀ ਜਿਹੜਾ ਹੁਕਮ ਅਲਾ ਐਕਸਟਰਾ ਹੋਇਆ ਚੱਲ ਹੁਣ ਗਾਹ ਜਪੜਾ ਨੂੰ ਤਾਂ ਜਾਂਦਾ ਕਿੱਥੇ ਤਾਂ ਕਿ ਐਦਾਂ ਨਾ ਕੋਈ ਪਤਾ ਦੀ ਕਿੱਥੇ ਨੂੰ ਜਾਣਾ ਕੋਈ ਪਤਾ ਦੀ ਕਹਣੇ ਜੇ ਪੂਰਬੀ ਇਸ ਕਰੀਏ ਪਛਮੇ ਨਹੀਂ ਲੈ ਜਾਏ ਨਾ ਕਰੇ ਬਤਾ ਕਰੇ ਪੂਰਬ ਸਤਾਈ ਪਛਮੇ ਲੈ ਜਾਏ ਕਹਿੰਦੇ ਹੀ ਦੀ ਹੋ ਵੀ ਤਦ ਜਾਣਾ ਕਦ ਜਾਣਾ ਕੀ ਕਰਨਾ ਕੀ ਨਹੀਂ ਕਰਦੋ ਚਲ ਉਹਨੂੰ ਪਤਾ ਹੀ ਨਹੀਂ ਰਹਿਣਾ ਕਿਉਂ ਸੋਚੇ ਨਹੀਂ ਇਹ ਅੱਗੇ ਵੱਰ ਚੱਲਣਾ ਇਹ ਮਰ ਚੱਲ ਰਣ ਉਹ ਨਹੀਂ ਚੱਲਦਾ ਵੀ ਹੈ ਚੱਲਦਾ ਵੀ ਹੁਕਮ ਚਾਹੇ ਹੁਕਮ ਜਿਹੜਾ ਮਾਰਕਾ ਚੱਲਣਾ ਆਪਣੀਆ ਸੋਚ ਦੀ ਸੋਚ ਮਰੀ ਹੋਈ ਜਾ ਉਹ ਆਜ਼ਾਦੀ ਹੋਇਆ ਸੋਚ ਮੰਦਾਂ ਜਿਹੜੀ ਆ ਨਾ ਆਪਣੀ ਇੱਛਾਵਾਂ 'ਤੇ ਨਿਰਭਰ ਉਹ ਤੁਹੇ ਦੀਆ ਵਰਦ ਜੇ ਉਹ ਮਰ ਗਈ ਤਾਂ ਰਹਿ ਗਈ ਇੱਕ ਗਿਆ ਇੱਕ ਹੋ ਗਿਆ ਉਹਨੇ ਜੇ ਸੋਚ ਮਰ ਗਈ ਇੱਕ ਕੋਈ ਹੁਕਮ ਨਹੀਂ ਗਿਆ ਦੂਆ ਹੁਕਮ ਦੂਰ ਗਿਆ ਆਪਣਾ ਡਕਰਾਉਣ ਵਾਲਾ ਉਹ ਹੁਕਮ ਦਾ ਮਨ ਬੋਲ ਹੁਕਮ ਦਾ ਬਲ ਨਹੀਂ ਕੀ ਕਰਦਾ ਸੀ ਵਿਛੜ ਚੋਟਾ ਉਹ ਹੁਕਮ ਵਿਛੋੜ ਕੇ ਚੋਟ ਖੜਾਉਂਦਾ ਸੀ ਉਹ ਪਹਿਲਾਂ ਹੀ ਮਾਰਦਾ ਆ ਚੋਟ ਆਵੇ ਨਾ ਵਿਛੜੀਏ ਤਾਂ ਆ ਉਹ ਤਾਂ ਉਹ ਕਹਿੰਦਾ ਇਨੇ ਵਾਰਿਆ ਕਹਨ ਹੌਬੂਆ ਕਹਨ ਹੌਦਾ ਮਰ ਗਿਆ ਕਿ ਨਾ ਮਾਰੇ ਮੈਂ ਮਾਰਿਆ ਮਾਰੇ ਆਪੇ ਹੀ ਹਾਂ ਬੂਆ ਮੈਂ ਮਾਰਿਆ ਤੂੰ ਮਾਰਿਆ ਮੈਂ ਨੇ ਹੁ ਮਾਰਿਆ ਹੌਲੀ ਬੇ ਮਾਰਿਆ ਹਾਂ ਬੂ ਬੇ ਤਾਂ ਹੀ ਗੇ ਲਿਆ ਦੋੇ ਲੜਪੇ ਕਾਰ ਰੌ ਦੋੇ ਵਰਕੇ ਦਵਾਈ ਉਹ ਬਿਮਾਰੀ ਨਾਲ ਲੜਦੀ ਬਿਮਾਰੀ ਦਵਾਈ ਨਾਲ ਲੜਦੀ ਦੋਏ ਹਜ ਖਤਮ ਹੋ ਗਈ ਤਾਂ ਉਹ ਦੋਵਲੋਂ ਹੋ ਗਿਆ ਫਰੀ ਠੀਕ ਹੋ ਗਿਆ ਫਰੀ ਤੰਤਰ ਸਥਾਨ ਹੋਇਆ ਜਿਹੜੇ ਦਵਾਈ ਲੜੀ ਉਹ ਜਰਾਸੀ ਖਤਮ ਹੋ ਗਈ ਉਹ ਜਰਾਸੀ ਵੀ ਖਤਮ ਹੋ ਗਏ ਉਹ ਆਪਣਾ ਤੰਤਰੂਸ ਹੋ ਗਿਆ ਉਹ ਗਣਾ ਲੋ ਗੁਰ ਲੜਪੇ ਗੁਰਾਣੇ ਹੈ ਉਹ ਗਣ ਭਰ ਹੋ ਗਿਆ ਤਾਂ ਜਦੋਂ ਕਿ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਦੇ ਤਮਾਹੇ ਸਮਾਏ। ਤਦ ਕੇ ਸਿਮਰਨ ਉਹ ਬੋਦੀ ਕੀ ਮਲ ਜਾਏ। ਅਮਰਤ ਕਿਉਂਕਿ ਮੈਂ ਹੈ ਉਥੇ ਮੈੜਾ ਬ੍ਰਹਮਾ ਮੈੜਾ ਇੱਦੂ। ਉਹ ਸਾਰੇ ਛਿਪ ਤੇ ਲੈ ਕੇ ਬ੍ਰਹਮਾ ਤੇ ਲੈ ਕੇ ਵਿਸ਼ਣੂ ਤੇ ਲੈ ਕੇ ਸਾਰੇ ਮਾਇਲੇ ਦੇ ਨੇ। ਮਾਇਆ ਸੂਰ ਮਾਇਆ ਹੈ ਕੰਬ ਸਭ ਕੁਝ ਮਾਇਆ ਮਲਤਾ ਇਹ ਸੰਸਾਰ ਸਾਰਾ ਹੀ ਗਹਿਤਾ ਪਾਇਆ ਮਾਇਆ ਜਦੋ ਸਭਾਇਆ ਮਾਇਆ ਸਭ ਕੁਝ ਹੋਦਾ ਪਾਇਆ ਦਾ ਹੇਲੋ ਬੋਇ ਮਾਇਆ ਮਾਇਆ ਦਾ ਹੋਏ ਮਾਇਆ ਹੋਰ ਕੁਛ ਨਹੀਂ ਜੇ ਉਹ ਛੱਡ ਦਿੱਤਾ ਮਾਇਆ ਛੁੱਟ ਗਈ ਮਾਇਆ ਛੁੱਟ ਗਈ ਅਡੋਰੀ ਇਹ ਜਿਹੜਾ ਮਾਇਆ ਦਾ ਮੋਹ ਹੈ ਇਹਦੇ ਨਾਲੇ ਲੋਭ ਹੈ ਇਹਦੇ ਨਾਲੇ ਸ਼ਰੀਰ ਦੀ ਭਾਇ ਇਹਦੇ ਨਾਲੇ ਕੋਈ ਆਪਣਾ ਇਹਦੇ ਨਾਲੇ ਪਰਾਇ ਇਹਦੇ ਨਾਲੇ ਬੈਰੀ ਇਹਦੇ ਨਾਲੇ ਭਗਤ ਇਹਦੇ ਨਾਲੇ ਜਦ ਅਸੀਂ ਮਾਇਆ ਨਾਲੇ ਬਹੁਤ ਟਿਕਾਂਡ ਸੁਸਤੀ ਤੇ ਕਿਤੇ ਨਾ ਤੋੜ ਗਏ ਉਹ ਦਜੋਲਦੀ ਅਮਰਤ ਨਾਮ ਰੇਤ ਮਾਨੇ ਸਮਾਈ ਨਾਮ ਰੇਤ ਜਦ ਬਰਤੀ ਮਾਲ ਜਉਗੀ ਤਾਂ ਅਮਰਤਾਂ ਗਿਉਗਾ यह तो भजन सच पाया संतोषी जिना जर्मन से मारला मारदी कोखा भारत की भूखा भारत से उठ बोलू बाय चे जदी करू भारत चे कप करू भारत से तू उठ बोल के खाऊ सबने सब कुछ लालच में सो के करूंगा जब लाल ਬਹਿ ਲਈ ਚਲੀ ਗਈ ਇਹ ਬਹਿ ਜਾਂਦੀ ਹੈ ਪਰ ਉਸ ਸਮਾਂ ਨਾਲ ਬੁਝ ਕੇ ਭਲ ਫੇਰ ਅੰਬਰ ਤੋਂ ਵਰਤ ਬਹੁਤ ਸਮਾਂ ਚੱਲ ਬੁਝ ਦਾ ਅਸਰ ਇਹ ਨਹੀਂ ਕਰਦਾ ਆ ਮਤਲਬ ਜਿਵੇਂ ਕਹਿਣਾ ਨਾ ਬਾਣ ਦਾ ਅਸਰ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਆ ਗੱਲ ਹੈ ਠੀਕ ਕਰੋ ਬੇਸਰ ਉਸ ਤੋਂ ਬਾਅਦ ਅਸਾ ਤਾਂ ਹੁਦੀ ਹੋ ਰਿਆ ਫਿਰ ਮਰਦ ਨਾਮ ਰਿਦਮ ਹੈ ਸਮਾਏ ਫਿਰ ਅੰਦਰੋਂ ਸਭ ਲਗੂਆ ਮਰਦਾ ਜਿਵੇਂ ਥੱਲੇ ਗਿੱਲੀ ਦੀ ਨੀਰ ਆ ਜਾਂਦੀ ਹੈ ਨਾ ਬਹੁਤ ਦਾ ਤਾਂ ਪੈਦਾ ਸੁੱਕਾ ਜਿਆਦਾ ਗੱਲਾ ਜਿਆਦਾ ਗੱਲਾ ਆਇਆ ਨਾ ਬਗਰ ਅਜਾਉਂਦੇ ਨੇੜੇ ਹੀ ਪੜ ਜੂਂਦੇ ਨੇ ਫੇ ਆਸ ਲੱਜ ਜਾਂਦੀ ਆ ਮਰਦ ਨਾਮ ਉਹ ਸਮਾਇਆ ਹੋਇਆ ਜਿਹੜਾ ਕਹਨਾ ਹਿਰਦੇ ਚ ਪਾਣੀ ਜਿਵੇਂ ਸਮਾਇਆ ਹੁੰਦਾ ਜਮੀ ਚ ਉਹ ਉੱਥੇ ਤੱਕ ਪਹੁੰਚ ਜਾਂਦਾ ਸਮਝੋ ਡੇਢ ਹੀ ਆ ਗਿਆ ਹਾਂਜੀ ਪ੍ਰਭ ਜੀ ਬਸੇ ਸਾਧ ਕੀ ਨਾਨਕ ਜਨਕਾ ਦਸ਼ਮ ਦਸਨਾ ਪ੍ਰਭ ਜੀ ਬਸੇ ਸਾਧ ਕੀ ਫਿਰ ਜਿਹੜਾ ਸਾਧ ਹੋ ਗਿਆ ਨਾ ਮਨ ਸਾਧਿਆ ਗਿਆ ਉਹਦੀ ਜਿਹੜੀ ਰਸਨਾ ਸੀ ਉਹ ਜਿਹੜੀ ਬੋਲਣ ਸ਼ਕਤੀ ਮਨ ਕੋਲ ਬੋਲਣ ਸ਼ਕਤੀ ਹੈ ਉਹ ਤਾਂ ਹੀ ਸਰੀਰ ਨਾਲ ਬੋਲਦਾ ਹੈ ਉਹ ਕੀ ਇਹ ਬੋਲਣ ਸ਼ਕਤੀ ਅਕਲ ਹੈ ਉਹ ਜਿਹੜੀ ਆਪ ਜੀ ਉਹਦੇ ਚ ਨਵਾਸ ਅਕਰਚਨ ਨਵਾਸ ਕਰ ਜਾਂਦੀ ਉਹਦੀ ਜ਼ੁਬਾਨ ਤੇ ਚੜ ਜਾਂਦਾ ਹੈ ਜੇ ਸਤਿਗੁਰਾਂ ਉਹਦੀ ਜ਼ੁਬਾਨ ਤੇ ਤਾਂ ਗੁਰਬਾਣੀ ਹੈ ਨਾ ਫਿਰ ਫਿਰ ਵਾਦਦਾ ਸਾਧ ਕੀ ਰਸਨਾ ਦੇ ਸਾਥ ਦੇ ਰਸੋਂ ਤੇ ਜੱਗਵਾ ਆ ਜਾਂਦਾ ਜਾਦਾ ਜੋ ਪੂਰਾ ਫੌਰਾ ਨਹੀਂ ਆਇਆ ਪਰ ਢਿੱਲਾ ਆ ਗਿਆ ਸਨੇ ਇਹ ਜਦੇ ਆ ਜਾਂਦਾ ਸੱਚ ਦੀ ਗੱਲ ਜਦੇ ਕੰਮ ਆ ਜੇ ਸੁਪਨੇ ਕਿਉਂ ਬਸ ਇੱਥੇ ਕੋ ਸੁਪਨਾ ਟੁੱਟ ਜਾਂਦਾ ਸੁਪਨਾ ਟੁੱਟ ਜਾਂਦਾ ਤੇ ਸੰਸਾਰ ਉਹ ਨਜ਼ਰ ਜਿਹੜਾ ਹੁੰਦਾ ਇਹਨਾਂ ਲੱਗਦਾ ਪਹਿਲਾਂ ਘਰ ਹੜਾ ਤਾਂ ਪਹਿਲੇ ਜਾਂਦਾ ਬਹੁਤ ਹੜਤਾ ਪਰਦਾ ਦਾ ਪ੍ਰਭਾਵ ਵਧ ਜੰਦਾ ਇਹਦਾ ਫਿਰ ਜਾਣੇ ਬਿਲਕੁਲ ਪੜਨ ਜਾਂਦਾ ਬਿਲਕੁਲ ਜਦੋਂ ਬਾਨਰ ਤੇ ਆਉਂਦਾ ਦਰੂਖਾ ਮਾਂ ਛੱਡਦਾ ਛੱਡਦਾ ਉਹ ਜਿਹੜੀ ਮੁਠੀ ਬੜੀ ਹੋਈ ਸੀ ਨਾ ਹਾਂ ਜੀ ਸਹਿਬਾ ਹਾਂ ਜੀ ਬਿਲਕੁਲ ਜਦੋਂ ਨਾ ਉਹ ਸਹਿਬਾ ਉੱਥੇ ਜਾ ਕੇ ਐ ਹੋ ਜਾਂਦਾ ਇਹ ਜਾਣੀ अ जडी बानिया बहुत खतरनाक है ये सुखनी है मना बना सुख पैदा करने वाली है ए बहन यो सुख पैदा हो जाना जिन अच्छा ना देखे सारा सुख में कम कम तो भीगिरा गया नो डुबो करे नो ज्यादा अपने को बंदूक है खोल बोडियां भी भरी हो जाती चल जे जितना जानते आपा पर हौसला तय है जत कोई है जे ना होवे ਤੇ ਤਾਂ ਜਿਹੜੇ ਛੋਟੇ ਮੋਟੇ ਕੁੱਤੇ ਬਿੱਲੇ ਤੋਂ ਵੀ ਡਰ ਲੱਗਦਾ ਕੁੱਤੇ ਨੇ ਕੜ ਕੇ ਤੇ ਝੂੜਨੀ ਦਾ ਗੱਲ ਛੱਡੋ ਛੋਟੇ-ਕੋਟੇ ਜਾਨਵਰ ਤੋਂ ਹਾਂਜੀ ਸਭ ਰਸਨਾ ਰੱਬ ਕੀ ਜਨਦਾ ਉਦੋਂ ਫਿਰ ਕੀਆ ਕੋਲ ਖੋਜੂ ਨਾ ਆਪਣੇ ਤੋਂ ਆਪਣੇ ਅੰਦਰ ਹੀ ਖੋਜੂ ਇਹ ਤੇ ਸਮਝਾਉਣ ਲੱਗਿਆ ਬਸ ਹੈ ਜਨਕਾ ਦਾਸ ਨਾਨਕ ਜਨਕਾ ਦਾਸਨ ਦਸਨ ਜਿਹੜਾ ਐਸਾ ਜਨ ਜਿਹਦੀ ਰਸਾਂ ਤੇ ਵੀ ਪਸ ਜਵੇ ਨਾਨਕ ਉਹਦਾ ਵੀ ਦਾਸਨ ਦਸਨ ਦਾਸਨ ਉਹ ਆਇਆ ਬਸ ਸੱਚ ਕਰਨ ਉਹ ਉਹ ਹੋ ਜਾਈਆ ਉਹ ਨਹੀਂ ਹੋਣੀ ਬੀਹੜ ਬੋਤਾਂ ਜੇ ਕੋਈ ਬੱਚਾ ਜਿਆਦਾ ਡੁੱਬੜ ਵਧੀਆ ਲੈ ਕੇ ਪਾਸ ਹੋ ਜਾਂਦਾ ਸਕੂਲ ਚ ਉਹ ਟੀਚਰ ਹੋਰ ਪੜ੍ਹੇ ਲਿਖੇ ਤੋਂ ਸਿਆਣੇ ਵੀ ਉਹਦੀ ਚਿਤ ਕਰਦੇ ਖਤਰ ਨਾ ਕਰਦੇ ਚਾਹੇ ਉਹ ਹੋਰ ਵਿਗੜਨਾ ਹੁੰਦਾ ਵੀ ਲੈਕ ਹੈ ਉਹ ਲੈਕ ਵਾਲੀ ਜਿਹਦਾ ਦਾ ਸੁਣ ਦਸਣਾ ਉਹਦੀ ਲੜਕੀ ਨੂੰ ਇਹਦਾ ਸੁਣ